ਅਸਿਕ ਪਵੀ ਮਾਨ ਸੋਰ ਨਰਕ ਪਤੀ ਹੋਤ ਸਵਾਲ ਇਸ ਕਰਮ ਜਿਸ ਅੰਤਰ ਕਾਰ ਹੋ ਗੱਬ ਮਨ ਰਾਜਾਂ ਉਹ ਨਰਕ ਪਤੀ ਹੈ ਨਰਕ ਤੋਂ ਸੱਜਿ ਨਰਕ ਦੇ ਲਹੂ ਸਵਾਲ ਹੈ ਨਰਕਪਾਤੀ ਦਾ ਹੈ ਅਜਿਤੇ ਖੱਲੇ ਤੋਂ ਜਾਣੇ ਨਰਕ ਆਜੀ ਤੋਂ ਦੀ ਜੂਝ ਜਾਣੇ। ਨਰਕਪਾਤੀ ਦਾ ਹੈ ਨਰਕ ਦਾ ਅਕਲਾ ਤਾਂ ਹੈ। ਹੱਤਿਆਰ ਪਾਤੀ ਨੂੰ ਹੱਤਿਆਰ ਕਹਿੰਦੇ ਨੇ। ਅਕਲਾ ਨੂੰ ਕਹਿੰਦੇ ਨੇ ਪਾਤੀ। ਤੇ ਹੋਵੇ ਸਵਾਨ ਕੁੱਤਾ ਵਣ। ਉਹ ਕਿਸ ਸੋਰ ਨਰਕਪਾਤੀ ਹੋਊ ਕੁੱਤਾ। ਉੱਤੇ ਦੀ ਜੂਣ ਮੜਦੀਆਂ ਉਹਨੂੰ। ਤੇ ਜਾ ਕੁੱਤਾ। ਉਹਦੇ ਸਵੇਰ ਤੇ ਕੁੱਤਾ ਨਹੀਂ ਗੌਸਬਾਨੇ ਆਉਂਦੇ ਗੌਸਬਾਨੇ ਕੁੱਤਿਆਂ ਨੇ ਵੀ ਬਹੁਤ ਸਾਰੇ ਹੁੰਦੇ ਸਵੇਰ ਨੇ ਆਦਮਿਆਂ ਜੋ ਜਾਣੇ ਮੈਂ ਜੋਗਰ ਬੰਸ ਜਾਣੇ ਮੈਂ ਜੋਗਨਵੰਤ ਜਿਹੜਾ ਜਿਹੜਾ ਬਹੁਤ ਖੂਬਸੂਰਤ ਹਾਂ ਸੋ ਹੌਬਤ ਬੇਸ਼ਕਾਹਾਂ ਜਾਂ ਤਾਂ ਉਹ ਵੀ ਕੋਈ ਬੇਸ਼ਕਾਹ ਜਾਂ ਤਾਂ ਬੜੇ ਖੂਬਸੂਰਤ ਨੇ ਔਰ ਜੱਜ ਬੜੇ ਖੂਬਸੂਰਤ ਨੇ ਮੱਛਾਂ ਬੜੇ ਖੂਬਸੂਰਤ ਨੇ ਕੋਈ ਵੀ ਖੂਬਸੂਰਤ ਜਿਹੜਾ ਮਰਜੀ ਬਣ ਜਾ ਉਹ ਹੋ ਜਾ ਬਣ ਜਾ ਮਾਇਆ ਦਾ ਮਾਇਆ ਵਿਸ਼ਦਾ ਹੀ ਹੈ ਮਾਇਆ ਵਿਸ਼ਦਾ ਹੀ ਵਿਸ਼ਦਾ ਸਰੀਰ ਵਿਸ਼ਦਾ ਵਾਲਾ ਬੜੂ ਹੋਰ ਕੀਆ ਮਾਇਆ ਉਹਨੂੰ ਕ੍ਰਿਸ਼ਨ ਰਸ ਨੇ ਵਿਸ਼ਦਾ ਮਾਪੇਟਾ ਜੋਗਨ ਕੀਦਾ ਹੈ ਸਰੀਰ ਦਾ ਜੋਗਨ ਮੰਨ ਵਧੀਆ ਹਾਂ ਜਨਮ ਮਰੇ ਕੋ ਜੋਨ ਪਰਮਾ ਹੋਵੇ ਆਪ ਉਸ ਕੋ ਕਰਮੰਦ ਕਹਾਵੇ ਅਇਆ ਕਰਮ ਕਾਢੀ ਨੇ আর ਇਹ ਪ੍ਰਿਆਦਾ ਵਾਲੇ ਸਾਰੇ ਤੁਨ ਕਾਢੀ ਨੇ ਜਿਹੜੇ ਆਪ ਉਸ ਕੋ ਕਰਮੰਦ ਕਹਾਵੇ ਜਨਮ ਪਰ ਆ ਜਨਮ ਜੋਨ ਪਰਮਾ ਹੋਵੇ ਵਾਲੇ ਨੇ ਇੱਥੇ ਤੱਕ ਇਹ ਕਰਮ ਕਾਢ ਜਨਮ ਮਰੇ ਜਨਮ ਦਾ ਵਰਦਾ ਉਹ ਜੋਨ ਨਹੀਂ ਸੁਦਾ ਪ੍ਰਾਪਤੀ ਨਹੀਂ ਹੈ ਅਗਰ ਕੰਨ ਚਾਹੇ ਗੁਰਦੁਆਰਾ ਨਹੀਂ ਨਹੀਂ ਮੁਕਤੀ ਗੁਰੂ ਦਾ ਸ਼ਮਾਨਾ ਬਸ ਇਸ਼ਤਾਰਾ ਨਹੀਂ ਬਣਦਾ ਕੀ ਫਾਇਦਾ ਐ ਜੇ ਤੁਹਾਨੂੰ ਦਾ ਫਾਇਦਾ ਬਹੁਤ ਜੁਲਮਾਂਡ ਕਰਦਾ ਸਾਰੇ ਫਰਦਾਂ ਭੂਮੀ ਦਾ ਜੋ ਕਰੇ ਗਮਾਨ ਭੂਮੀ ਆ ਗਈ ਜਿਹੜਾ ਇਹਦਾ ਹੰਕਾਰ ਕਰੇ ਉਹ ਗਿਆਨੀ ਮੂਰਖ ਆ ਵੀ ਤੇਜ ਜ਼ਹਿਰੀ ਦੇਹੀ ਹੈ ਕਿ ਤੂ ਮੁਰਖਾਂ ਅਗਿਆਦੀ ਹੈ ਆਜੋ ਤਾਂ ਨਾ ਜਾਣ ਨਾਲ ਮੰਨ ਤੇ ਸੌਪੜਦੇ ਵੀ ਤੂੰ ਬਦੀ ਜਾਂਦੇ ਉਹ ਹਣ ਕਰਦਾ ਤੇ ਮੁਰਖਾਂ ਅਗਿਆਦੀ ਹੈ ਸ੍ਰੀ ਕਿਰਪਾ ਜਿਸ ਦੇ ਹਿਰਦੇ ਗਰੀਬੀ ਬਸਾਵੈ ਨਾਨਕ ਇੰਨਾ ਮੁਕਤ ਆਗੇ ਸੁਖ ਪਾਵੈ ਸ੍ਰੀ ਕਿਰਪਾ ਕਿਰਪਾ ਆਪਣੇ ਦੁਆਰਾ ਜੇ ਕਿਸੇ ਜ਼ਹਿਰ ਤੇ ਸਾਧਨ ਨਾ ਨ ਗਿਆ ਕੋਤਾ ਅੱਗੇ ਜਾ ਸਕਦਾ ਐਸੇ ਤਾਂ ਮੁਕਤੀ ਪ੍ਰਾਪਤ ਕਰ ਲਈ ਹੋ ਚਲਦਾ ਗਿਆ ਸੁਖ ਸਾਗਰ ਵੱਲ ਅੱਗੇ ਯਾਰ ਅੱਗੇ ਜਾ ਕੇ ਸੁਖ ਸਾਦਰ ਚਲਾ ਜਾਊਗਾ ਮੁਕਤੀ ਤੇ ਸੁਖ ਸਾਗਰ ਨਹੀਂ ਹੈ ਮੁਕਤੀ ਜਵਾਦ ਸੁਖ ਨਹੀਂ ਆਏਗਾ ਅੱਗੇ ਆਈ ਦਾ ਹੁਣ ਤੋਂ ਬੱਪਰੇ ਵੀ ਜਾਣੇ ਲਿਆਗਾ। ਇਹ ਜਿੱਨੇ ਆਇਆ ਸੋ। ਮੂਰਤੀ ਦਾ ਖਤਰਾ ਇਹ ਆ ਕਿ ਤੁਸੀਂ ਇਹ ਨੂੰ ਰੱਖੀ। ਆਹ ਬੇਕਾਬੂ ਕਦੇ ਹੋ ਜਾਂਦਾ। ਇਹ ਨਾ ਚੜਾ ਸੱਪ ਜਿਹਾ ਨਾ। ਉਹ ਨਾ ਚੜੇ ਇਹ ਤਾਂ ਫਿਰ ਸ਼ੁਰੂ ਹੋਏ ਤਾਂ ਇਹ ਮਾਮਲਾ ਹੈਗਾ ਹਾਂਜੀ